ਲੱਲ ਅਖਰ ਤੋਂ ਵਿਸ਼ੇਸ਼ ਹੈ ਜੀ ਭਗਤ ਕਬੀਰ ਜੀ ਦਾ 36 ਨੰਬਰ ਪੌੜੀ ਤੇ ਜੀ ਹੋਰ ਜੀ ਲੱਲਾ ਐਸੇ ਲਿਵ ਮਨ ਲਾਵੇ ਅਨੰਤ ਜਾਏ ਪਰਮ ਸੱਚ ਪਾਵੇ ਅੰਨਿਆ ਤੋਂ ਹੋਰ ਜਗ੍ਹਾ ਨਹੀਂ ਜਾਂਦਾ ਫਿਰ ਛੱਡ ਕੇ ਉਹ ਜਗ੍ਹਾ ਨੂੰ ਦੂਸਰੀ ਜਗ੍ਹਾ ਨੂੰ ਜਿੱਥੇ ਜਾਂਦਾ ਉੱਥੇ ਧਿਆਨ ਫਿਰ ਅਨੰਤ ਨੇ ਜਾਏ ਪਰਮ ਸੱਚ ਪਾਵੇ ਅਗਰੇ ਜੇ ਨਰਮਨ ਲੈ ਜੋੜਦਾ ਆਪਣੇ ਗੋਬਿੰਦਨ ਨਾਲ ਆਪਣੀ ਮੂਰ ਨਾਲ ਇਹ ਫਿਰ ਉਤੋਂ ਲੈ ਬ ਹੋਰ ਜਗ੍ਹਾ ਵੀ ਹਟਾਉਂਦਾ ਹੈ ਉਤੋਂ ਫਿਰ ਹਟਦਾ ਵੀ ਹੈ ਉਤੋਂ ਧਿਆਨ ਹਟਾਉਣਾ ਨਹੀਂ ਆਪਾਂ ਪਰਮ ਸੱਚ ਦੀ ਪ੍ਰਾਪਤੀ ਕਰ ਲੈਂਦਾ ਉਹ ਮਤਲਬ ਪੈਰ ਚਾਹੀਦਾ ਸੀ ਲੱਲਾ ਐਸੇ ਮਨ ਲਾਵੇ ਅਨਿਆਤ ਨਾ ਜਾਏ ਪਰਮ ਸੱਚ ਪਾਵੇ ਹਾਂਜੀ ਪਰ ਜਬੀਰ ਨੇ ਇਦਾਂ ਹੀ ਕਰ ਦਿੱਤਾ ਅੰਨਕ ਕਰਤਾ ਹੋਰ ਘੋਟ ਅਨਿਆ ਕਰ ਠੀਕ ਹੈ ਹੋਰ ਫੋਰ ਤੋਂ ਨਹੀਂ ਜਾਂਦਾ ਅਰ ਜੋ ਤਹਾ ਪ੍ਰੇਮ ਲਿਵ ਲਾਵੇ ਤੋ ਅੱਲਾ ਲਹ ਲਹ ਚਰਨ ਸਮਾਵ ਹੈ ਅਰ ਪ੍ਰੇਮ ਲਿਵ ਲਾਵੇ ਔਰ ਹੀ ਉੱਥੇ ਪ੍ਰੇਮ ਨਾਲ ਲੈਵ ਲੱਗ ਜਾਂਦੀ ਹੈ ਕੋ ਤੈਨੂੰ ਅੱਲਾ ਦੀ ਪ੍ਰਾਪਤੀ ਹੁੰਦੀ ਅੱਲਾ ਲਹ ਲਾਗ ਕਰਨ ਤੋਂ ਆਵੇ ਅਤੇ ਉਹਦੇ ਅੱਲਾ ਦੇ ਚਰਨਾਂ ਦੇ ਵਿੱਚ ਹੀ ਸਮਾ ਜਾਂਦਾ ਹੈ। ਉੱਥੇ ਜਿੱਥੇ ਲਗੀ ਹੁੰਦੀ ਹੈ ਉੱਥੇ ਹੀ ਦੀ ਪ੍ਰਾਪਤੀ ਹੁੰਦੀ ਹੈ ਉੱਥੇ ਹੀ ਅੱਲਾ ਹੁੰਦਾ ਹੈ। ਉਸੇ ਜਦੋਂ ਦੇ ਵਿੱਚ ਸਮਾ ਜਾਂਦਾ ਅੱਛਾ ਜੀ ਸੁਨ ਸਮਾਗ ਅਨਹਰ ਤਹਿਨਾਦ ਸੁਨ ਹੋਇਆ ਨਾ ਨੁ ਟੇ ਤਹਿਨਾਦ ਸਮਾਦ ਉੱਥੇ ਪ੍ਰਗਟ ਹੋਇਆ। ਆਹ ਨਾ ਜਾਈ ਅਸਚਾਰ ਜੀ ਬਿਸਮਾਹ ਇਹ ਗੱਲ ਅਕੇ ਪ੍ਰਾਪਤ ਨੇ ਸਭ ਕੁਝ ਪ੍ਰਾਪਤ ਹੋ ਜਾਂਦਾ ਔਰ ਕੋਈ ਤੇ ਉਹ ਬਿਸਮਾਹ ਹੈ ਠੀਕ ਹੈ ਜੀ ਤੇ ਅੱਲਾ ਦਾ ਭਾਵ ਸਤਗੁਰ ਹੋਇਆ ਜੀ ਹਾਂ ਅੱਲਾ ਬਣੂਰ ਅੱਛਾ ਜੀ ਚਲਕੇ ਆਮ ਤੌਰ ਤੇ ਲੱਗਦਾ ਇਸ ਤਰ੍ਹਾਂ ਵੀ ਉਹ ਅੱਲਾ ਪਰਮੇਸ਼ਰ ਨੂੰ ਕਹਿੰਦੇ ਆ। ਗਏ ਹੋਏ ਤੇ ਗਲਤੀ ਕਰੀ ਫਿਰਦੇ ਨਾ। ਜਿਹੜੀ ਇਹਦੇ ਕੋਲ ਸ਼ਬਦ ਪੈਦਾ ਦੇ ਨਾਲ ਇਹਨਾਂ ਧਿਆਨ ਇਹਦਾ ਦੇ ਵਿੱਚ ਸਮਾ ਜਾਣਾ। ਆਪਣਾ ਵजूद ਵੱਖਰਾ ਰਹਿਣਾ। ਅੱਜ ਤਾਂ ਇੱਕ ਹੋਇਆ। ਇਕ ਹੋਏ ਜੇਲਪ ਹੋਏ ਤਾਂ ਉਗੂ ਵੇ ਜਦੋਂ ਉਗਦਾ ਹੈ ਫਿਰ ਸ਼ਬਦ ਚ ਸਮਾ ਜਾਂਦਾ ਹੈ ਨੇ ਫਿਰ ਉਹ ਸੱਚ ਸ਼ਬਦ ਹੈਗਾ ਕਿ ਪੈਦਾ ਹੋਇਆ ਜਾਂਦਾ ਠੀਕ ਤੇ ਰਾਮ ਜੋ ਹੈ ਉਹ ਪਰਮੇਸ਼ਰ ਹੈ ਪਰ ਰਾਮ ਵੀ ਅੱਲਾ ਵਾਂਗੂ ਆਪਣਾ ਮੂਲ ਹੈ ਜੀ ਤੇ ਉਹ ਨਹੀਂ ਗਾਇਬ ਕੀਤਾ ਹੋਇਆ ਨਾ ਜੇ ਦਾੜ ਵਾਲਾ ਤਾਂ ਗਾਇਬ ਨਾ ਕਰ ਦੇ ਤਾਂ ਮਸਲਾ ਹੱਲ ਹੋ ਜਾਣਾ ਸੀ ਵਗਲਾਇ ਜੱਤੇ ਸਵਾਲ ਹੈ ਜੱਤੇ ਠੀਕ ਆਇਆ ਜੱਤੇ ਦਾੜਾ ਵਾਲਾ ਸਬਸਕ੍ਰਿਪਟ ਲਿਆ ਠੀਕ ਹੈ ਜੀ ਠੀਕ ਆਲਿਆਂ ਨੇ ਵੀ ਦਾੜਾ ਵਾਲਾ ਸਬਸਕ੍ਰਿਪਟ ਸਾਰੇ ਸਾਰੇ ਸਬਦ ਵਿਚਾਰ ਕੱਖ ਦੀ ਇਸੇ ਕਰਕੇ ਠੀਕਿਆਂ ਦਾ ਕੱਖ ਜਿੰਨਾ ਕੋ ਸਰਵ ਤੇ ਲਿਖਿਆ ਹੋਇਆ ਸਾਖੂ ਦੀ ਰਹਾ ਬੰਦੇ। ਦਾੜਾ ਲਖਾ ਕੇ ਜੀ। ਕੋਣ ਹੈ ਜੀ ਉਪਦੇਸ਼ ਗੁਰੂ ਨਾਨਕ ਸਾਹਿਬ ਦਾ ਛੋਡੀ ਮੀਠਾ ਮਾਇਆ ਮੋਹ ਕੀਆ। ਲਾਇ ਧੰਦਾ ਜਿਨ ਜੋੜੀ ਕਰਦਾ ਨਾਲ ਆਗਿ ਜਿਦੇ ਨਾਲ ਜੋੜ ਕੇ ਛੜ ਦਿੱਤੀ। ਆਇਆ ਦਾ ਉਹ ਲਾਤਾ ਉਹ ਧੰਦੇ ਦੇ ਵਿੱਚੋਂ ਬਜੀ ਖਰੀ ਕਰਦੀ ਹੈ ਅੱਛਾ ਕਿਨੇ ਧੰਦੇ ਚ ਜੀ ਇਹ ਆਪਣੀ ਬੋਲ ਅੱਛਾ ਅਸੁਰਤ ਛੱਡਦੀ ਹੈ ਜੀ ਛੱਡੀ ਤਾਂ ਠੀਕ ਸੀ ਸਰੀਰ ਤੋਂ ਘਾਂ ਕੰਪ ਨਹੀਂ ਹੋਗਾ ਦਾ ਕੰਪ ਨਹੀਂ ਲੈ ਰਿਹਾ ਵਾਲੇ ਕਿਹੜੇ ਤਾਂ ਆਇਆ ਸੀ ਲਾ ਲੈ ਉਹ ਨਹੀਂ ਲੈ ਰਿਹਾ ਸਰੀਰ ਵੀ ਉਸੇ ਵਾਂਗ ਕਰ ਰਿਹਾ ਖਾਣਾ ਪੀਣਾ ਸਮ ਸਹਿਣਾ ਪਾਣੇ ਤੱਕ ਹੁਕਮ ਪਿਆ ਖਾਣਾ ਪੀਣੋ ਜਿਹੜਾ ਇਹਨੂੰ ਸਮਾਨ ਮੰਨ ਕੇ ਖਾਹੇ ਚਾਹੇ ਬਿੱਲੇ ਚਾਹੇ ਨਾਂਵਲੇ ਖਾਂਦੂ ਸਮਾਨ ਮੰਨੇ ਭੁੱਖਾ ਰਹੇ ਆ ਸੁਖ ਨੂੰ ਬਰਾਬਰ ਮੰਨ ਕੇ ਚੱਲੇ ਸੰਕਰ ਸੈਣ ਪਾਣੇ ਤੱਕ ਹੁਕਮ ਪਿਆ ਫੇਰ ਪਾਣੇ ਦੇ ਵਿੱਚ ਫੇਰ ਹੁਕਮ ਦੇ ਵਿੱਚ ਪੈ ਗਿਆ ਇਹ ਖਾਂਡ ਫੀਟ ਵੱਲ ਧਿਆਨ ਹਟਾ ਕੇ ਹੁਕਮ ਦੇ ਨਾਲ ਜਗੜ ਕੇ ਖਾ ਲਿਆ ਨਾਂਵਲੇ ਆ ਨਾਹੀਂ ਤੇ ਉਹ ਪਾਣੇ ਦੇ ਵਿੱਚ ਇਹ ਜੇ ਫੇਰ ਧੰਦੇ ਚ ਨਹੀਂ ਹੈ ਫੇਰੇ ਪਾਣੀ ਚ ਹੈ ਜੀ ਫੇਰ ਪਾਣੀ ਚ ਫੇਰ ਧੰਦੇ ਜੀ ਹੁਣ ਹੈ ਜੀ ਗੌੜੀ ਬਾਵਨ ਅਖਰੀ ਮਹੱਲਾ ਪੰਜਵਾਂ ਚੋਂ ਚਾਰ ਪੌੜੀਆਂ ਦਾ ਹੈ ਜੀ ਲੱਲੇ ਅਖਰ ਦਾ ਉਪਦੇਸ਼ ਜੀ ਅੱਛਾ ਤੇ ਲੱਲੇ ਅਖਰ ਦੇ ਕਾਫੀ ਜ਼ਿਆਦਾ ਜਾਨ ਬਖਸ਼ਿਆ ਸਭ ਤੋਂ ਪਹਿਲਾਂ 11ਵੀਂ ਪੌੜੀ ਹੈ ਜੀ ਪੌੜੀ ਲੱਲਾ ਲਬਟ ਬਖੈਰਸ ਰਾਤੇ ਅਹੰਗ ਬੁੱਧ ਮਾਇਆ ਮਦਮਕ ਮਾਇਆ ਦੇ ਰਸਾ ਨੂੰ ਲੱਪਟੇ ਹੋਏ ਨੇ ਰਖੇ ਰਸਾ ਨੂੰ ਲਪਟੇ ਹੋਏ ਜੀਵ ਰਾਤੇ ਇਹਨਾਂ ਆਉ ਬੁੱਧ ਭਾਇਆ ਮਦ ਮਾਤੇ ਕਾਰਾੜੀ ਬੁੱਧੀ ਹੈ ਭਾਇਆ ਦਾ ਹਸਾ ਭਾਇਆ ਮਦ ਮਾਤੇ ਭਾਇਆ ਦਾ ਹਸਾ ਰੂਪਾਰੀ ਬੁੱਧੀ ਹੈ ਮਾਇਆ ਮਹਿ ਜਨਮ ਮਰਨਾ ਜਿਉਂ ਜਿਉਂ ਹੁਕਮ ਤੇ ਵੈ ਕਰਨਾ ਯਾ ਮਾਇਆ ਮਹਿ ਜਨਮ ਹੋਣਾ ਇੱਕ ਕਲ ਸਨੇ ਧਿਆਨ ਕਰ ਲਿਓ ਜੇ ਮਾਇਆ ਦੇ ਵਿੱਚ ਲੁਪਟੇ ਤਾਂ ਹੋਏ ਹੋ ਤੁਸੀਂ ਜਿੱਦਾਂ ਜਿਹੜਾ ਮਾਇਆ ਜੋ ਜਨਮ ਮੋਰ ਬਣਿਆ ਰੁਕੇ ਮਾਇਆ ਦੇ ਵਿੱਚ ਜਨਮ ਬਣਨਾ ਜਾਂ ਮਾਇਆ ਮੈਂ ਜਨਮ ਹੈ ਮੋਰਨਾ ਹੈ ਮਾਇਆ ਦੇ ਤੇ ਜੋ ਕਰ ਕਰਦੇ ਹੋ ਤੁਸੀਂ ਆਪ ਹੀ ਸਾਨੂੰ ਉਹੀ ਹੋ ਰਿਹਾ ਦੋਤੇ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਹੋ ਰਿਹਾ ਹੋਜੀ ਕੋਉ ਊਨ ਨਾ ਕੋਉ ਨਾ ਕੋਈ ਮੂਰਾ ਨਾ ਕੋਈ ਕਮੀਆਂ ਦੇ ਸੱਜ ਨਾ ਕੋਈ ਵਾ ਨਾ ਕੋਈ ਪੂਰਾ ਨਾ ਕੋਈ ਛੋੜਾ ਸਿਆਣਾ ਨਾ ਕੋਈ ਮੂਰਖ ਬਸ ਇਹ ਤਾਂ ਜਿਵੇਂ ਉਹ ਕਰਾਉਣਾ ਖੜੀ ਜਾਂਦੇ ਚੰਗਾ ਕੰਮ ਹੋ ਜਾਂਦਾ ਮਾੜਾ ਹੋ ਗਿਆ ਉਹਨੇ ਤੁਸੀਂ ਕੀਤਾ ਜਿਹੜਾ ਆਦਮੀ ਕਰਾਇਤੇ ਕਰਦਾ ਉਹਨੇ ਛੋੜਾ ਉਹਨੇ ਨਾ ਪੂਰਾ ਹੋਈ ਜਿੱਤ ਲਾਵੋ ਤਿੱਦ ਤਿੱਦ ਲਗਣਾ ਨਾਨਕ ਠਾਕੁਰ ਸਦਾ ਜੇ ਜੇਤੂ ਲਾਬੋਟੇਟਰ ਲਗਣਾ ਜਿਵੇਂ ਖੇ ਲਾਇਆ ਹੋਇਆ ਤੇ ਤੇਵੇ ਤੇ ਵੀ ਲੱਗੇ ਹੋਏ ਨੇ ਕੰਮ ਕੋ ਠਾਕੁਰ ਸਦਾ ਲਿਪਣਾ ਜੇ ਲਾਏ ਹੋਏ ਨੇ ਉਹ ਸਦਾ ਦਿੱਤਾ ਹੈ ਪਰ ਜੀਵ ਜਿਹੜੇ ਲਾਏ ਹੋਏ ਨੇ ਕੰਦੇ ਲੱਗੇ ਹੋਏ ਜੀ ਵੀ ਇਹੀ ਨੇ ਕੰਮ ਕਰਦੇ ਜਿਹੜਾ ਕਰਾਉਣ ਵਾਲਾ ਉਹ ਇਹ 11ਵੀਂ ਪੌੜੀ ਦਾ ਉਪਦੇਸ਼ ਸੀ ਜੀ ਹੁ 12ਵੀਂ ਪੌੜੀ ਚ ਉਪਦੇਸ਼ ਹੈ ਜੀ ਲੱਲੇ ਅੱਖਰ ਦਾ ਔੜੀ ਲੱਲਾ ਲਵੇ ਨਾ ਕੋਉ ਇੱਕ ਨਾ ਹੋਉ ਲੱਲਾ ਤਾਂ ਕੋਈ ਵੀ ਨਹੀਂ ਹੈ ਇੱਕ ਹੈ ਆਪ ਅਵਰ ਨਾ ਹੋਉ ਜੇਰਾ ਆਪ ਇੱਕ ਹੋ ਗਿਆ ਆਪੇ ਇੱਕ ਹੋ ਗਿਆ ਉਹਦੇ ਬਰਗਾ ਹੋਰ ਕੋਈ ਨਹੀਂ ਹੈਗਾ ਓਦੇ ਨੇੜੇ ਕੋਈ ਵੀ ਨਹੀਂ ਉਹ ਬਸ ਇਕੱਲਾ ਹੀ ਆ ਉਥੇ ਉਹ ਸੱਚਖੰਡ ਚਾ ਉਹਦੇ ਲਵੇ ਨਹੀਂ ਹੁੰਦਾ ਕੋਈ ਉਹ ਮਾਇਆ ਵੀ ਨਹੀਂ ਉਹਦੇ ਲਵੇ ਮਾਇਆ ਔਰ ਵਕਾਰ ਉਹਦੇ ਲਵੇ ਨਹੀਂ ਹੁੰਦੇ ਇਹਦਾ ਮਤਲਬ ਇਹ ਹੈ ਹਾਂਜੀ ਪੂਆ ਕ ਅੰਤ ਨਕਾਹੂ ਪਾਇਆ ਹੋਵਣ ਹਾਰ ਹੋਤ ਸਦ ਆਇਆ ਉਹ ਹਾਰ ਹੈ ਜੀਵ ਸਦਾ ਹੀ ਹੁੰਦਾ ਹੈ ਜਨਮ ਇਹਦਾ ਸਦਾ ਇਤਵ ਲੈਦਾ ਹੈ ਹੋਣ ਹਾਰ ਹੋ ਤਸਦ ਆਇਆ ਉਹ ਆਕਾਰ ਅੰਤਰ ਕਾਉਂ ਪਾਇਆ ਇਹਦਾ ਕੋਈ ਪਤਾ ਨਹੀਂ ਕਦੋਂ ਤੋਂ ਹੁੰਦਾ ਆਇਆ ਜਿਵੇਂ ਕੋਈ ਅੰਤਰ ਇਹਦਾ ਕਿੰਨੇ ਜਨਮ ਇਹਦੇ ਹੋ ਗਏ ਕਿੰਨੇ ਬਰਸ ਹੋ ਗਏ ਕਿਸੇ ਨੂੰ ਕੋਈ ਖਬਰ ਨਹੀਂ ਇਸ ਬਾਰੇ ਇਹਦਾ ਨਹੀਂ ਹੱਤ ਪਾਇਆ ਅਰ ਅੱਜ ਤੱਕ ਹੋਊਗਾ ਇਹ ਕੋਈ ਹਿਸਾਬ ਦੇ ਸਕਦਾ ਇਹਦਾ ਅਸਲੀ ਜਿਹੜਾ ਪਾਇਆ ਹਾਂਜੀ ਹਸਤੀ ਮੈਂ ਪੂਰ ਸਮਾਨੇ ਪ੍ਰਗਟ ਪੁਰਖ ਸਭ ਥਾਉ ਜਾਣੇ ਇਕ ਹਸਮੈ ਪੂਰ ਸਮਾਨੇ ਚਾਹੇ ਕੀੜੀ ਦੇ ਵਿੱਚ ਆਤਮਾ ਜੀਵ ਜਾਂ ਹਾਕੀ ਦੇ ਵਿੱਚ ਆ ਉਹੀ ਕੀੜੀ ਵਿੱਚ ਆ ਉਹੀ ਹਾਕੀ ਵਿੱਚ ਪੂਰਤ ਮੰਗੋ ਸਮਾਨ ਰੂਪ ਦੇ ਦਾ ਜਨਮ ਕੀੜੀ ਨੂੰ ਮਿਲ ਜਾ ਫਿਰ ਜਨਵਰ ਦੇ ਜੀਵ ਨੂੰ ਹਾਕੀ ਦਾ ਮਿਲ ਜਾ ਕੋਈ ਨਹੀਂ ਫਰਕ ਪੈਂਦਾ ਪ੍ਰਗਟਾ ਪੁਰਖ ਸਭ ਕੋ ਜਾਣਦੇ ਇਹ ਪੁਰਖ ਹਰ ਜਰਦਾ ਮਖਲੂਕ ਪ੍ਰਗਟ ਕਰਦੀ ਬੀਬੀ ਜਾਣਦਾ ਹਾਥੀ ਚ ਵੀ ਪ੍ਰਗਟ ਕਰ ਸਕਦਾ ਹੈ ਵੀ ਪ੍ਰਗਟ ਕਰ ਸਕਦਾ ਜੀ ਜੀ ਹਸਤ ਮਹਿ ਪੂਰ ਸਮਾਨ ਪ੍ਰਗਟ ਪੁਰਖ ਸਭ ठाओ ਜਾਣੇ ਠੀਕ ਹੈ ਵੀ ਜੋਤ ਜਿਹੜੀ ਚ ਵੀ ਉਹੀ ਹੈ ਤੇ ਹਾਥੀ ਚ ਵੀ ਹੋਈ ਹੈ ਹਾਂਜੀ ਜੋਤ ਆਪਣੇ ਆਪ ਨੂੰ ਪ੍ਰਗਟ ਕਰਦੀ ਹੈ ਬਾਹਰਲੇ ਸਰੀਰ ਦਾ ਜਿਹੜਾ ਆਕਾਰ ਹੈ ਉਹਦਾ ਕੋਈ ਫਰਕ ਨਹੀਂ ਬਾਹਰਲਾ ਆਕਾਰ ਜੋਤ ਵਿੱਚ ਜੋਤ ਵਿੱਚ ਆਕਾਰ ਨਹੀਂ ਹੁੰਦਾ ਸੁਖਮੈ ਜਾਣੂ ਉਸੂਲ ਹੈ ਐਡਾ ਦਾ ਸਰੀਰ ਹੈ ਇਹ ਸੁਖਮ ਦੇ ਵਿੱਚ ਹੈ ਲੋਕਾਂ ਅੱਗੇ ਵਿਚਨੀ ਆ ਉਹ ਬਾਠੀ ਜੋ ਤੇ ਆ ਹਾਂਜੀ ਜਾ ਕੋ ਦੀਨੋ ਜਪਨਾ ਆਪਣਾ ਹਰ ਰਸ ਤੇ ਦੇ ਦਿੱਤਾ ਇੱਕ ਵਾਰ ਰਾਸ ਜਿਨਾ ਜਰ ਮਿਵਾਲੀ ਸਦਾ ਹਰਾਜੀ ਕੇ ਪਿਆ ਜਾ ਸਕਦਾ ਸਾਸ-ਸਾਸ ਨਹੀਂ ਸਿਮਿਆ ਜਾ ਸਕਦਾ ਕੋਸਿੰਦ ਬਿਨਾਂ ਰਸ ਤੇ ਰਸ ਮਿਲ ਗਿਆ ਉਹ ਸਾਸ-ਸਾਸ ਸਿਮ ਰੋ ਉਹਦੇ ਇੱਥੇ ਆਇਆ ਹਾਂਜੀ ਠੀਕ ਹੈ ਜੀ ਇਹ 12ਵੀਂ ਪੌੜੀ ਦਾ ਉਪਦੇਸ਼ ਸੀ ਜੀ ਹੁਣ ਹੈ ਜੀ ਆ ਨੰਬਰ ਪੌੜੀ ਦਾ ਉਪਦੇਸ਼ ਹੈ ਜੀ ਗੌੜੀ ਬਾਵਨ ਅਖਰੀ ਚੋਂ ਪੌੜੀ ਦਾ ਉਪਦੇਸ਼ ਹੈ ਜੀ ਪੌੜੀ ਲੱਲਾ ਲਾਵੋ ਔਖਦ ਦੁਖ ਦਰਦ ਤੈ ਮਿਟੇ ਖਿਨਾਹੂ ਇਹ ਯਾਨੀ ਦਵਾਈ ਹੈ ਨਾ ਉਹ ਦਵਾਈ ਇਹ ਲਾ ਲੋ ਜਿਹਨੋ ਦਵਾਈਏ ਲੱਗ ਜੂਗੀ ਦੁਖਦਰਦ ਸੇ ਮਟੇਗਾ ਨਾਉ ਹੋਇ ਕਿ ਟਕਣੇ ਚੋਂ ਦੁਖਦਾਰ ਦੀ ਦਵਾਈ ਐ ਸਰਕਾਰ ਰੋਗੀ ਐ ਜਿਹਨੂੰ ਨਾ ਮਿਲ ਗਿਆ ਜਦੋਂ ਦੁਖਦਰਦ ਮਟ ਜਾਵੇਗੇ ਕਿੰਦੇ ਵਿੱਚੇ ਦੁਖਦਰਦ ਮਟ ਤੇ ਮਟੇ ਖਿਨਾਉ ਹੋ ਖਿਰ ਦੂਰ ਹੋ ਜਾਣਗੇ ਹੋਜੀ ਨਾਮ ਔਖਰ ਜੇ ਹਿਰਦੈ ਹਿਤਾਵੈ ਰੋਗ ਸੁਪਨਾ ਨਹੀਂ ਆਵੇ ਉਹ ਰੋਗ ਹਟਾ ਲਗਿਆ 22 ਸਪਨੇ ਹੋਣਾ ਆਵੇ ਉਹਦਾ ਸੁਪਨੇ ਚ ਵੀ ਰੋਗ ਨਹੀਂ ਹੋਮੀਦੀ ਰੋਗ ਹੋਵੇ ਹੋਵੇ ਨਿਰਰੋਗ ਹੈ ਸੁਪਨੇ ਚ ਵੀ ਆਪਨੇ ਖੜੀ ਨਹੀਂ ਹੋ ਭਾਈ ਗੁਰਪੂਰੇ ਬਿਨ ਵਿਦੀ ਨਾ ਬਣਾਈ ਇੱਕ ਹੋਰ ਗੱਲ ਆ ਕਹਿੰਦੇ ਸਾਰੇਆਂ ਦੇ ਅੰਦਰ ਹੀ ਹੈ ਹਰ ਅਵਗਦ ਕਿਤੇ ਬਾਹਰੋਂ ਲੈਣ ਦੀ ਲੋੜ ਨਹੀਂ ਬਾਹਰੋਂ ਲੈਣ ਜਾਣ ਦੀ ਵੀ ਬਾਹਰ ਕੋਈ ਦਊਕ ਨਹੀਂ ਦਊ ਹਰ ਅਵਗਦ ਸਭ ਅੰਦਰ ਇਸ ਕਰਕੇ ਗੁਰਮੁਖੀ ਦਾ ਪੂਰਾ ਗਿਆਨ ਲੈ ਲਓ ਹਰ ਅਵਗਦ ਲਭ ਲਓ ਸਾਰੇ ਰੋਗ ਮਿਟ ਜਾਣਗੇ ਗੁਰਪੂਰੈ ਸੰਜਮ ਕਰ ਦਿਆ ਨਾਨਕ ਤੋਂ ਫਿਰ ਦੁੱਖ ਨਾ ਥੀਆ ਗੁਰਪੂਰੈ ਨੇ ਸੰਜਮ ਕਰਕੇ ਸਾਹਵ ਨਾਲ ਜਿੰਨਾਂ ਲੋੜ ਸੀ ਉਸ ਨਾਨਕ ਤੋਂ ਫਿਰ ਦੁੱਖ ਨਾ ਥੀਆ ਫਿਰ ਦੁੱਖ ਨਹੀਂ ਰਿਹਾ ਬਿਲਕੁਲ ਵੀ ਹੋਜੀ ਇਹ ਦਾ ਸੀਗਾ ਜੀ ਹੁਣ ਹੈ ਜੀ ਬਮੰਝਮੀ ਪੌੜੀ ਦਾ ਅਪਦੇਸ਼ ਜੀ 52 ਨੰਬਰ ਪੌੜੀ ਵਿੱਚ ਹਾਂ ਔੜੀ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪਮਤ ਜਿਉ ਪਿੰਡ ਜਿਨ ਸੁਖ ਦੀਏ ਤਾਂ ਹੀ ਨਾ ਜਾਣਤ ਤਤ ਹਰਾਮੀ ਹੈ ਗੁਨਾਹਗਾਰ ਹੈ ਜੀ ਗੁਨਾਹਗਾਰ ਬੇਗਾਨਾ ਬੇਗਾਨਾ ਹੈ ਜਿਹਦਾ ਇਹਦਾ ਹੋਰੇ ਕਿਸੇ ਦਾ ਬਣਾਇਆ ਜਿਹਦਾ ਬਾਪ ਬਣਾਇਆ ਕਿਸੇ ਦੇ ਘੜਾ ਵਾਲਾ ਕਿਸੇ ਦਾ ਬੁੱਢਾ ਬਣਾਇਆ ਹੈ ਬੇਗਾਨਾ ਅਲਪਮਤ ਮਤ ਵੀ ਥੋੜੀ ਹੈ ਥੋੜੀ ਮਤ ਵਾਲਾ ਜਗਾ ਨਾ ਬਣਿਆ ਆਪਣੇ ਦਿਲਾਂ ਨਾਲ ਨਹੀਂ ਬਣਿਆ ਹੈ ਜੋ ਦੇ ਲੈਵਲ ਤੇ ਰਿਸ਼ਤੇ ਨਹੀਂ ਰੱਖਦਾ ਜਾਤ ਦੇ ਲੈਵਲ ਤੇ ਰਿਸ਼ਤੇ ਰੱਖਦਾ ਜੀ ਉਹ ਪਿੰਡ ਜੀ ਨੂੰ ਸੁਖ ਦੀ ਜੀ ਨੂੰ ਜੀਵਨ ਦਾ ਤਤ ਤਤ ਅਸਰੀ ਹੋਰ ਇਹ ਰਿਸ਼ਤੇ ਆਪਣੇ ਮੂਲ ਨੂੰ ਨਹੀਂ ਪਛਾਣਦਾ ਆਇਆ ਵੀ ਗੱਲ ਕਰਦਾ ਜੀ ਉਹ ਜੋਤ ਹਾਂ ਹਾਂ ਪਿੰਡ ਨੂੰ ਸਮਝਦਾ ਹੈ ਬਾਰੇ ਗਿਆਨ ਨਹੀਂ ਰੱਖਦਾ ਕਹੇ ਬੇਗਾਨਾ ਹਾਂਜੀ ਲਾਹਾ ਮਾਇਆ ਕਾਰਨੇ ਦਹ ਦਿਸ ਢੂੰਡਣ ਜਾਏ ਦੇਵਨਹਾਰ ਦਾ ਤਾਰ ਪ੍ਰਭ ਨਿਮਖ ਨਾ ਮਨਹਿ ਬਸਾਈ ਵਾਇਆ ਦੇ ਨਵੇਂ ਨੋ ਤਾਂ ਦਸਾਂ ਦਸਾਂ ਦੇ ਵਿੱਚ ਤੁਰਿਆ ਫਿਰਦਾ ਢੂੰਡਦਾ ਫਿਰਦਾ ਕਿਤੇ ਨੌਕਰੀ ਮਿਲ ਜਾਏ ਮਿਲ ਜਾਏ ਵਪਾਰ ਹੋ ਜਾਵੇ ਦੇਵਨਹਾਰ ਦਾ ਤਾਰ ਪ੍ਰਭ ਹੈ ਜੋ ਉਹ ਤਾਂ ਨਹੀਂ ਮਨ ਚ ਬਸਾਉਂਦਾ ਇੱਕ ਸਕੰਟ ਤੋੜ ਲਾ ਫਿਰ ਉਹ ਦੇਣੇ ਵਾਲੇ ਨੇ ਦੇਣਾ ਜੇ ਦੇਣੇ ਵਾਲਾ ਮਿਲੂਗਾ ਜਿੱਥੇ ਮਿਲੂਗਾ ਉਹੀ ਦੇਊਗਾ ਬਾ ਡੋਲਦਾ ਅੰਦਰ ਬੈਠਾ ਦੇਣੇ ਵਾਲਾ ਝੂਠ ਬੇਕਾਰ ਮੋਹ ਜਾਂ ਮਨ ਮਾਹੇ ਲੰਪੜ ਚੋਰ ਨਿੰਦਕ ਮਹਾ ਤਿਨਹੂ ਸੰਗ ਬਿਹਾਈ ਲਾਲ ਜਿਕੇ ਲਗਾਇਆ ਝੂਠ ਤੇ ਬਸਾਰਾ ਕਿ ਉਹ ਤੇ ਫਸ ਇਹ ਸਭ ਤੇ ਮਨ ਆਹੀ ਸੰਪਤੀਏ ਮੰਦੇ ਵਿੱਚ ਰੱਖੀ ਹੀ ਤੇ ਜਿਤਰ ਹੋਰ ਹੈ ਇਹ ਸੰਪਤੀਏ ਨੂੰ ਨਹੀਂ ਛੜਦਾ ਲੰਬੜੇ ਚੋਰ ਰਿੰਦਕਾ ਵਾਹ ਵਾਲੇ ਇਹੋ ਸੰਗ ਬੜੀ ਬਣਦੀ ਹੈ ਬੜੀ ਹੋਈਆਂ ਉਹਨਾਂ ਨੇ ਕੋਈ ਨਾਪਤਾ ਹੈ ਨਹੀਂ ਸੱਜਤਾ ਹੈ ਨਹੀਂ ਠੁੱਠੇ ਵਾਂ ਠੋਠਿਆਂ ਦੀ ਇਹਨਾਂ ਨਾਲੇ ਬਣਦੀ ਹਾਂਜੀ ਤੁਦ ਬਖਸ਼ ਲੈ ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਾਹਨ ਨੀਰ ਤਰੇ ਤੁਧ ਭਾਵੇ ਦਾ ਬਖਸ਼ੋ ਹੈ ਜਦ ਤੇਰੀ ਇੱਛਾ ਹੁੰਦੀ ਹੈ ਤੇਰੀ ਰਜ਼ਾ ਹੁੰਦੀ ਹੈ ਤਾਂ ਜਿਹੜੇ ਤੂੰ ਖਰਿਆ ਵੀ ਬਖਦੇ ਆਂ ਪਰ ਖਰਿਆ ਦਾ ਸੰਗਤ ਕਰਨ ਵਾਲੇ ਖੋਤੇ ਬਖਦੇ ਜਾਂਦੇ ਨੇ ਕੱਲੇ ਖੋਤੇ ਦੀ ਬਖਦੇ ਜਾਂਦੇ ਖਰਿਆ ਦੇ ਸੰਗਤ ਕਰਕੇ ਖਰਿਆ ਦੀ ਸੰਗਤ ਕਰਨ ਵਾਲੇ ਖੋਤੇ ਵੀ ਬਖਦੇ ਜਾਂਦੇ ਨੇ ਤੇਰੀ ਇੱਛਾ ਹੁੰਦੀ ਹੈ ਨਾਨਕ ਪਾਵੇ ਪਾਉਣ ਵਰਮ ਪਾਣ ਰਹੀ ਰਹੀ ਉਹਨਾਂ ਕੰਗਾ ਪਾਉਣ ਵਰਮ ਚੌਨਾ ਹੋਵੇ ਪੱਥਰ ਵੀ ਡਰ ਜਾਂਦੇ ਨੇ ਪਾਣੀ ਤੇ ਪੱਥਰ ਵੀ ਪਾਣੀ ਚਰ ਦੇ ਉਪਦੇਸ਼ ਦੀ ਸਮਾਪਤੀ ਜੀ ਹਾਂ ਤੇ ਲੱਲੇ ਅੱਖਰ ਤੋਂ ਭਗਤ ਕਬੀਰ ਜੀ ਤੋਂ ਗੱਲ ਸ਼ੁਰੂ ਹੋਈ ਸੀ ਲੱਲਾ ਇਸੇ ਲਿਵਨ ਲਾਵੇ ਜੇ ਮਨ ਨੂੰ ਨਿਵਲਾਉਣ ਦਾ ਤਰੀਕਾ ਆ ਜਾਵੇ ਆ ਫਿਰ ਓ ਅੱਲਾ ਦੇ ਚਰਨਾਂ ਦੀ ਪ੍ਰਾਪਤੀ ਕਰ ਲੈਂਦਾ ਹੈ ਜੀ ਅੱਲਾ ਵਿੱਚ ਸਮਾ ਜਾਂਦਾ ਜੀ ਗੁਰਨਾਥ ਸਾਹਿਬ ਨੇ ਇਹੀ ਉਪਦੇਸ਼ ਦਿੱਤਾ ਵੀ ਜੇ ਖਾਣਾ ਪੀਣਾ ਦਾ ਫਿਕਰ ਛੱਡ ਕੇ ਹੁਕਮ 'ਚ ਰਹੇ ਤਾ ਫੇਰ ਇਹ ਧੰਦੇ ਤੋਂ ਛੁੱਟ ਸਕਦਾ ਬਿਲਕੁਲ ਗੁਰੂ ਅਮਰਦਾਸ ਜੀ ਵੱਲੋਂ ਕੋਈ ਉਪਦੇਸ਼ ਨਹੀਂ ਹੈ ਜੀ ਤੇ ਪੰਜਵੇਂ ਪਾਤਸ਼ਾਹ ਨੇ ਚਾਰਪੌੜੀਆਂ 'ਚ ਲੰਲੇਖਰ ਦਾ ਉਪਦੇਸ਼ ਦਿੱਤਾ ਹੈ ਤੇ ਮੂਲ ਗੱਲ ਇਹੀ ਹੈ ਅੱਲਾ ਲਬਤ ਬਖੈਰ ਅਸਮਾਤੇ ਆੰਗ ਬੁੱਧ ਮਾਇਆ ਮਦਮਾਤੇ ਇਹਦੀ ਹਾਲਤ ਹੈ ਇਹ ਮਾਇਆ ਮੈਂ ਜਨਮੇ ਮਰਨਾ ਜਨਮ ਮਰਨ ਦੇ ਛੁਟਕਾਰਾ ਪਾਉਣਾ ਚਾਹਣਾ ਹੈ ਮਾਇਆ ਛੱਡਣੀ ਪਏਗੀ ਬਿਲਕੁਲ ਠੀਕ ਹੈ ਜੀ ਇਹ ਲੱਲੇ ਅਖਰ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਇੱਥੇ